ਦੇ ਲੋਕ ਮਹੱਲਾ ਤੀਜਾ ਜਗਤ ਅਗਿਆਨੀ ਅੰਧ ਹੈ ਦੂਜੇ ਭਾਏ ਕਰਮ ਕਮਾਏ ਦੂਜੇ ਭਾਏ ਜੀਤੇ ਕਰਮ ਕਰੇ ਦੁਖ ਲੱਗੈ ਤਨ ਤਾਏ ਆ ਜਗਤ ਦੇ ਅੰ内 ਅੰਦਰ ਲੋਕ ਤਾਂ ਗਿਆਦੀ ਦੇ ਗਿਆਨ ਹੈ ਨਹੀਂ ਅੰ内 ਦੂਜੇ ਭਾਏ ਕਰਮ ਕਮਾਏ ਤਾਂ ਮਾਇਆ ਦੇ ਪਿੱਛੇ ਦੂਜੀ ਭੁੱਖ ਹੈ ਸ਼ਰੀਰ ਦੀ ਦੂਜੇ ਭਾਏ ਦਾ ਮਰਵਾ ਸ਼ਰੀਰ ਦਾ ਦੂਜਾ ਮਾਇਆ ਮਾਇਆ ਦੇ ਕਰਮ ਕਮਾਉਦੇ ਨੇ ਮਾਇਆ ਦੀ ਕਮਾਈ ਕਰਦੇ ਨੇ ਜਿਹੜੀ ਇੱਥੇ ਹੀ ਰਹਿ ਜਾਣੀ ਹੈ ਦੂਜੇ ਕਰਮ ਕਰਦੇ ਨੇ ਉਹਦੇ ਨਾਲ ਨੇ ਛੋਟੇ-ਬੜੇ ਜਿਹੇ ਦੀਸ਼ੇ ਲੋਕ ਵਿਆਪੇ ਚਿੰਤਾ ਰੋਗ ਉਹ ਚਿੰਤਾ ਦਾ ਰੋਗ ਨਾ ਨੂੰ ਵੀ ਚਿੰਤਾ ਦੇ ਨਾਲ ਡਿਪਰੈਸ਼ਨ ਹੋ ਗਿਆ ਬਲੱਡ ਪ੍ਰੈਸ਼ਰ ਹੋ ਗਿਆ ਦੁੱਖ ਲੱਗੇ ਤਾਂ ਨਾ ਥਾਏ ਵਾਲੇ ਸ਼ਰੀਰ ਨੂੰ ਦੁੱਖ ਜੇ ਮੜ ਜਾਂਦੇ ਨੇ ਧਾਕੇ ਲੱਗੇ ਹੋਏ ਕੇ ਰੁਕੋਇਆ ਕੇ ਸ਼ੂਗਰ ਇਹ ਰੋਗ ਤੋਂ ਸ਼ੁਰੂ ਹੋਇਆ ਰੋਗ ਨੇ ਸਾਨਸਿਕ ਭੈ ਤੋਂ ਸਾਨਸਿਕ ਤੋਂ ਰੋਗ ਸਰੀਰਕ ਬੜ ਜਾਂ ਗੁਰ ਸ਼ਬਦ ਕਮਾਏ ਸੱਚੀ ਬਾਣੀ ਕਰਮ ਕਰੇ ਅੰਗਨ ਨਾਮ ਧਿਆਏ ਜੇ ਉਹ ਆਦਮੀ ਗਿਆਨ ਨਵੇਂ ਗੁਰਬਾਣੀ ਦਾ ਗਿਆਨ ਦੀ ਕਿਰਪਾ ਸਾਧੂ ਦਾ ਗਿਆਨ ਦਾ ਪ੍ਰਸਾਦ ਮਿਲ ਜੇਵੇ ਗੁਰਬਾਣੀ ਵਿਚਾਰੇ ਜੋ ਕੁਝ ਪੱਲੇ ਪੈ ਜਵੇ ਇਹਦੇ ਨਾਲ ਸੁਖ ਪੈਦਾ ਹੁੰਦਾ ਗੁਰਕਾਰ ਚੱਲਣਾ ਚੱਬਣਾ ਚੱਲਣਾ ਰਤਨ ਸੇ ਸੁਣੀਆਂ ਰਹਿ ਗਏ ਜਿਹਨੇ ਸੁਣ ਕੇ ਛੱਡਤਾ ਉਹਦਾ ਰੋੜ ਕੇ ਲੈ ਕੇ ਕਲਪਨਾ ਦੀ ਨਦੀ ਉਹਨੂੰ ਫੇਰ ਜਿਹੜੇ ਚੱਬ ਕੇ ਪਹਿਲਾਂ ਮਨ ਇਹ ਪੂਰਾ ਕੇ ਬਾਲੀ ਨੂੰ ਫੇਰ ਚੱਲੇ ਗਏ ਉਹਦੇ ਤੇ ਉਹੀ ਰਤਨ ਸੇ ਰਹਿ ਗਏ ਨਾ ਬੁਧਿਆ ਦੀ ਉਹ ਫੇਰ ਵਹਿ ਗਏ ਕਲਪਨਾ ਦੀ ਨਦੀ ਚ ਆ ਰੋਜ਼ ਘੁੰਮਦੇ ਯਾਂ ਚਿੱਤਕ ਦਰਬਾਰ ਕਿਸੇ ਦੇ ਪਾਲ ਲੱਗੇ ਨਾ ਸਭ ਕਲਪਨਾ ਦੀ ਨਦੀ ਜੁੜੇ ਜਾਂਦੇ ਨੇ ਸੱਚੀ ਬਾਣੀ ਕਰਮ ਕਰੇ ਨਦੋਗ ਤੇ ਆਏ ਸੱਚੀ ਬਾਣੀ ਜਿਹੜੀ ਆ ਗੁਰਬਾਣੀ ਸੱਚੀ ਬਾਣੀ ਹੋਈ ਤਾਂ ਕਰੇ ਜੋ ਇਹ ਕਹਿੰਦੀ ਹੈ ਐਸੇ ਕਰਮ ਕਰੇ ਆਨੰਦਨ ਲੋਗ ਦੇ ਵਿੱਚ ਧਿਆਨ ਲੱਝ ਜੁੜਿਆ ਰਹਿ ਸਕਦਾ ਨਾਮ ਵਿੱਚ ਆਨੰਦਨ ਚਲਦ ਵਿਚਾਰ ਤੇ ਰਹਿੰਦਾ ਉਹਨੂੰ ਵਿੱਚੋਂ ਕੁਝ ਬਣਦਾ ਰਹਿੰਦਾ ਉਹਦਾ ਤੇਸ ਬਣਦਾ ਰਹਿੰਦਾ ਉਹਦਾ ਹੋਰ ਕਿਸੇ ਤੇਰਾਸ ਕੀ ਇਹ ਨਾ ਹੋਰ ਅਸਪਾਵਨ ਕਬੀਰ ਕਹਿੰਦਾ ਜਿਹਨੂੰ ਨਾਮ ਦਾ ਰਸ ਆ ਗਿਆ ਉਹ ਮਾਇਆ ਦੇ ਰਸ ਅਗੇ ਹੀ ਨਹੀਂ ਕਹਿਣਾ ਕਿਛੂ ਨਾ ਵੀ ਕਿਹਾ ਜਾ ਸਕਦਾ ਇਹ ਆਪਣੀ ਮਰਜ਼ੀ ਲੱਗਦਾ ਪਰ ਜੀ ਇਹਦੇ ਵੀ ਹੁੰਦੀ ਹੈ ਪਰਫੈਕਸ਼ਨ ਤੇ ਵੀ ਹੁੰਦੀ ਹੈ ਬਸ ਇਦੋਂ ਗਾਹ ਨਹੀਂ ਕੁਝ ਕਿਹਾ ਜਾ ਸਕਦਾ ਜਿਹਨੂੰ ਪ੍ਰਗਟ ਨਹੀਂ ਲਾਵੇ ਸਦੇ ਵਿੱਚ ਉਧਰ ਲੱਗਦਾ ਸਤੋਖ ਤੱਕ ਤਾਂ ਅਸੀਂ ਆਪਣੀ ਹੱਥ ਨਾਲ ਕਰ ਸਕਦੇ ਹਾਂ ਜਿੱਤੇ ਤੱਕ ਸਤੋਖ ਹੈ ਨਾ ਦੋ ਪਦਾਰਥ ਗੁਰਬਾਣੀ ਨੂੰ ਸਮਝਣਾ ਨਾ ਉਹਨੂੰ ਆਪਣੇ ਵਿੱਚ ਸਮਝਾ ਲੈਣਾ ਇੱਥੇ ਤੱਕ ਤਾਂ ਹੈਗਾ ਸਾਡੀ ਆਪਣੀ ਡਿਊਟੀ ਆਪਣੇ ਹੱਥੀ ਆਪਣਾ ਆਪੇ ਕਾਜ ਸਵਾਰੀਏ ਉਦੋਂ ਜਿਹੜਾ ਅਗਲਾ ਹੈ ਨਾ ਸਾਰੇ ਲਾਇਆ ਉਹ ਲਾਉਂਦਾ ਹੈ ਗੁਰਤੀ ਬਾਣੀ ਅਸਗਲੀ ਚਿੰਤ ਬੁਟਾਈ ਬੁਲਾਉਂਦਾ ਬੋਲਿਆ ਜਦੇ ਜਾ ਸਕਦਾ ਆਪਣੇ ਮਰਜ਼ੀ ਨਾਲ ਕੋਈ ਗੁਰਬਾਣੀ ਉਚਾਰ ਨਹੀਂ ਕਰ ਸਕਦਾ ਇਹ ਉਹਦੀ ਹਾਂਜੀ ਮਹੱਲਾ ਤੀਜਾ ਹਮ ਕਰ ਸਦਾ ਹੈ ਭਗਤੀ ਭਰੇ ਪੰਡਾਰ ਸਤਗੁਰ ਦਾਤਾ ਜੀ ਕਾ ਸਦ ਜੀਵੇ ਦੇਵਨ ਹਾਰਾ ਉਹ ਕਹਿੰਦੇ ਕਿਤੇ ਆਏ ਨਾ ਕਹਦੇ ਉਹ ਵੀ ਕਾਣੀ ਬਤਨ ਪਾਇਓ ਪਿੱਛੇ ਜੋ ਕੁਝ ਚੁੱਕ ਤੇ ਸੁਣਾਈ ਹੈ ਵੀ ਇਹ ਫਰਜੀ ਹੋਇਆ ਕਿਸੇ ਨੂੰ ਪੁਜਾਇਆ ਜਾਂ ਕਾਟਾ ਬਿਲ ਵੀ ਨਹੀਂ ਤੇ ਉਹ ਕਹਿੰਦੇ ਨੇ ਹਮ ਕਰ ਨਾਮ ਖਜ਼ਾਨਾ ਸਦਾ ਹੈ ਕਹਿੰਦਾ ਮੇਰੇ ਕੋਲ ਹੈ ਨਾਮ ਦਾ ਖਜ਼ਾਨਾ ਬਿਲਕੁਲ ਮਿਲਿਆ ਤਾਂ ਕਹੀ ਹੈ ਗੱਲ ਆਪ ਪੁੱਛੇ ਸਾਰੀ ਤਾਂ ਅਗਈ ਮੇਰੇ ਕੋਲ ਹੈਗੀ ਹੈ ਜਿਹਨੂੰ ਸ਼ੰਕਾ ਆਵੇ ਦੇਖ ਲਵੇ ਪੈਸਟਰ ਲੈ ਲਵੇ ਕੀ ਇਹ ਹੰਕਾਰ ਹੈ ਉਹ ਵੀ ਸੱਚ ਕਹਾਂਗੇ ਨਾ ਜੋ ਪਿੱਛੇ ਕਹਿ ਸੱਚੀ ਹੈ ਬਾਣੀ ਇਹ ਕਹੀ ਕਿ ਪਰਮੇਸ਼ਰ ਨੇ ਕਹਾਈ ਹੈ ਸਾਨੂੰ ਦੇਤਾ ਸਾਡੇ ਕੋਲ ਹੈ ਸਦਾ ਹੀ ਰਹਿੰਦਾ ਜਿਹਨੂੰ ਸ਼ੰਕਾ ਆਵੇ ਹਜ਼ੂਰ ਕਰ ਲਵੇ ਹਰ ਭਗਤ ਭਰੇ ਭਨਾਲ ਪੱਕੀ ਦੇ ਭਨਾਲ ਰਾਗ ਭਰੇ ਰਹਿੰਦੇ ਨੇ ਹਰ ਵਕਤ ਐਸ ਲਾਗੇ ਦੇਖ ਲੋ ਕਿੰਨੇ ਕੀ ਵੀ ਜਿੰਨਾ ਲੰਬਾ ਤੁਹਾਡਾ ਬਾਸ ਹੈ ਦੇਖ ਲੋ ਵੀ ਲੱਗਦੇ ਪੈਰ ਸਰੂਦਰ ਚ ਘੜੀ ਤੁਹਾਡੇ ਜੇ ਤੁਹਾਡੀ ਬੁੱਧੀ ਹੈ ਉਹਨੇ ਸਵਾਲ ਜੈ ਜੇ ਦਾਤਾ ਜੀ ਕਾ ਦੇਖੋ ਦਾਤਾ ਜੀਵਨ ਨੰਦਾ ਹੈ ਜੀ ਨੂੰ ਦਾ ਨੰਦਾ ਹੈ ਸ੍ਰੀ ਚੂਰੀ ਨੰਦਾ ਸਤਗੁਰੂ ਦਾਤਾ ਜੀ ਦਾ ਉਹ ਉਪਦੇਸ਼ ਹੈ ਜੀ ਵਾਸਤੇ ਹੈ ਸਭ ਜੀਵੇ ਦੇਵਨ ਹਰ ਜੇ ਦੇਵਨ ਸਦਾ ਹੀ ਜੋ ਸਦਾ ਹੀ ਜਾਂਦਾ ਜੇ ਆਪਣੇ ਨਾਲੇ ਵੇੜ ਲੈਂਦਾ ਕਰ ਲੈਂਦਾ ਜਮਲਬੰਦ ਕੱਟੇ ਹਾਂਜੀ ਅਨ ਸਦਾ ਕਰਾਂ ਸ਼ਬਦ ਅਪਾਰਾ ਸ਼ਬਦ ਗੁਰੂ ਕਾ ਸੱਦ ਚਰਾਂ ਯੁਗ ਯੁਗ ਵਰਤਾਵਨ ਹਰ ਹਾਂ ਤਨ ਕੀਰਤਨ ਸਦਾ ਕਰਨ ਉਹ ਕੀ ਕਰਦੇ ਨੇ ਜਿਹਨਾਂ ਕੋ ਖਜ਼ਾਨਾ ਹੁੰਦਾ ਜੰਦਾ ਉਹਦੀ ਕੀਰਤੀ ਕਰਦੇ ਨੇ ਕਰਦੇ ਨੇ ਸ਼ਬਦ ਅਪਾਰਾ ਆ ਜਿਹੜਾ ਗੁਰਕਾ ਸ਼ਬਦ ਦਾ ਗੁਰਬਾਣੀ ਇਹ ਤਾਂ ਅਪਾਰ ਹੈ ਇਹਦਾ ਬਾਰ ਘੋਂ ਪਾ ਲੂ ਜਿੱਦੀ ਵਰਜੀ ਵਿਚਾਰੀ ਆ ਉਰਦੇ ਗਾਵੇ ਗਾਣ ਗੁਰੂ ਦਾ ਗਿਆਨ ਮਿਲ ਜਨਾ ਗਾਂ ਗਾਂ ਜਾਂ ਸ਼ਬਦ ਗੁਰੂ ਦਾ ਸੱਡ ਉਚਰਨ ਦੇਖੋ ਸ਼ਬਦ ਦਾ ਗੁਰੂ ਦਾ ਪਰਮੇਸ਼ਰ ਦਾ ਦੋਤੀ ਬਣੀਏ ਉਹ ਤਾਂ ਉਚਾਰਣੇ ਕਰਦੇ ਨੇ ਬੋਲ ਕੇ ਹੀ ਦੱਸਦੇ ਨੇ ਇਹਦਾ ਹੈ ਗੁਰੂ ਦਾ ਪਰਮੇਸ਼ਰ ਦਾ ਉਹ ਉਚਰਦੇ ਨੇ ਉਚਰਨ ਉਹਨਾਂ ਬੋਲ ਕੇ ਹੀ ਦੱਸਦੇ ਨੇ ਸਾਡੀ ਬੋਲੀ ਚ ਉਹਨਾਂ ਨੂੰ ਬਿਨਾਂ ਸੁਣਾ ਤੇ ਸੁਣਦਾ ਉਹ ਕਰਨ ਵਾਲੀ ਸੁਣਨ ਵਾਲੀ ਬਾਲੀ ਗੁਰਬਾਨੀ ਬਣਾ ਕੇ ਸਾਧੂ ਕਰਦੇ ਉਚਾਰਨ ਕਰਦੇ ਉਚਰਨ ਜੁਗ ਜੁਗ ਵਰਤਮਾਨ ਹਾਰਾ ਇਹ ਸਮੇ ਸਮੇ ਸਿਰ ਭਗਤ ਪੈਦਾ ਹੁੰਦੇ ਰਹਿੰਦੇ ਨੇ ਸਾਰੇ ਸਾਰੇ ਸਿਰੇ ਵਰਤਾਰਾ ਦੁਨੀਆ ਨੂੰ ਬੰਧਾਰ ਰਿਹਾ ਹੈ ਇਹ ਵੇਚਾ ਜੀਵੰਦਾ ਹੈ ਜੁਗ ਜੁਗ ਸਮੇ ਸਮੇ ਸਿਰ ਹਰ ਜੁਗ ਜੁਗ ਭਗਤ ਪਾ ਆਇਆ ਪੈਜ ਰੱਖਦਾ ਆਇਆ ਜੇ ਕੋਈ ਕਹਿ ਹਰ ਵਕਤ ਹੈ ਕਿ ਖਿਆਲੋ ਸਭ ਖੁੱਲਾ ਰਹਿੰਦਾ ਦੁਨੀਆ ਨੂੰ ਗਿਆਨ ਹਰ ਵਕਤ ਨਹੀਂ ਮਿਲਦਾ ਇਹ ਉਹ ਵੀ ਬਲਦੇ ਰਹੀ ਦੁਨੀਆਂ ਦੇ ਵਿੱਚ ਵਿਰਤਾਂਤ ਬਦੀ ਨੇ ਇਹ ਜਿਹੜੀ ਹੈ ਆਕਾਸ਼ ਕੋਈ ਚਲਦੀ ਹੈ ਪ੍ਰਗਟ 12 ਕੋਈ ਚਲਦੀ ਗੁਪਤ ਉਹ ਸਮਾਂ ਗੁਪਤ ਰਹਿੰਦੀ ਹੈ ਇਹਦੀ ਜਾਣਕਾਰੀ ਲੋਕਾਂ ਨੂੰ ਨਹੀਂ ਮਿਲ ਜਾਂਦੀ ਹੈ ਫਿਰ ਖੋਜੀ ਖੋਜਣਾਂ ਨੇ ਬਹੁਤ ਸਾਰਿਆਂ ਨੂੰ ਪਿਆਸ ਹੁੰਦੀ ਹੈ ਉਹ ਸਾਰੇ ਖੋਜ ਕੇ ਉਹ ਪਾਰ ਹੋ ਜਾਂਦੇ ਨੇ ਉਹ ਜਿਹੜੇ ਘੱਟ ਬੁੱਧੀ ਵਾਲੇ ਰਹਿ ਜਾਂਦੇ ਲੋਕ ਯਾਰਾਂ ਦੇ ਸਮਝ ਨਹੀਂ ਆਉਂਦੀ ਵਿਦਵਾਨ ਫੇਰ ਇਹਨੂੰ ਉਲਟੇ ਰਸਤੇ ਪਾ ਦਿੰਦੇ ਨੇ ਫੇਰ ਡਿਵੈਲਪਮੈਂਟ ਹੋ ਜਾਂਦੀ ਹੈ ਬੁੱਧੀ ਵੀ ਜਿਹੜੇ ਪਿਛਲੇ ਉੱਤੇ ਉਹ ਫੇਰ ਉਹਨਾਂ ਜੋ ਕੋਈ ਨਾ ਕੋਈ ਫੇਰ ਕੇ ਤੇ ਕਿਰਪਾ ਆਖਿਆ ਉਹ ਫੇਰ ਉਹ ਸਮਝ ਆ ਜਾਂਦੀ ਹੈ ਇਦਾਂ ਹੀ ਹੁੰਦਾ ਰਹਿੰਦਾ ਇਹ ਜਿਵੇਂ ਕਬੀਰ ਤੋਂ ਬਾਅਦ ਕਿਰਾ ਫੇਰ ਵਿਟਰਾਤਾ ਦੁਨੀਆਂ ਨੇ ਗੁਲਨਾਨ ਖੁਦ ਹੀ ਫੇਚਾ ਲਿਆ ਉਦੋਂ ਬਾਅਦ ਫੇਰ ਵਿਟ ਉਦੋਂ ਬਾਅਦ ਹੁਣ ਫੇਰ ਕਿਰਪਾ ਕਰਤੀ ਪਤਾ ਲੱਗਿਆ ਜਿਵੇਂ ਸ਼ੰਕਾਉ ਦੱਸਿਆ ਸੀ ਇਹ ਕੰਤ ਹੈ ਠੀਕ ਹੈ ਇਹ ਮਨੁਆ ਸਦਾ ਸੁਖ ਵਸੈ ਕਹ ਜੇ ਕਰੇ ਵਪਾਰਾ ਅੰਤਰਗੁਰ ਰਤਨ ਹੈ ਮੁਕਤ ਕਰਾਵਣ ਹਾਰ ਜਿਹੜਾ ਵਪਾਰ ਕਰਦਾ ਨਾ ਹਾਂਜੀ ਉਹ ਕਹਿੰਦੇ ਬੰਦੂ ਹੈ ਕੋਈ ਚਿੰਤਾ ਉਹ ਉਹ ਤਾਂ ਤਤੀ ਤਵੀ ਤੇ ਬੈਠਾ ਵੀ ਸੁਖਿਆ ਉਹ ਬੰਦ ਬੰਦ ਕਟੇ ਹੋਏ ਵੀ ਪਰੇਸ਼ਾਨ ਨਹੀਂ ਹੈ ਉਹ ਕੋਪਰੀ ਲਈ ਤੇ ਵੀ ਨਹੀਂ ਪਰੇਸ਼ਾਨ ਹੈ ਉਹ ਆਰੇ ਨਾਲ چیرਿਆ ਵੀ ਸੀ ਨਹੀਂ ਕਰ ਰਿਹਾ ਇਹ ਸਾਰੇ ਟੈਸਟ ਦਿੱਤੇ ਹੋਏ ਨੇ ਮਾਧਵ ਤੇਤੀ ਦੀ ਬਾਤ ਕਹੀ ਦੀ ਬਾਣੀ ਐਸ ਦਾ ਵਾਝੋਏ ਗਿਆਨ ਹਰ ਰਤਨ ਹੈ ਕਿਉਂਕਿ ਉਹਦੇ ਅੰਦਰ ਕੀ ਹੈ ਬੰਦੇ ਗਿਆਨ ਰਤਨ ਆ ਜਿਹੜਾ ਗੁਰ ਗਿਆਨ ਹੈ ਗੁਰਬਾਨ ਗਿਆਨ ਹੈ ਰਤਨ ਹੈ ਰਤਨ ਨੂੰ ਕਹਿੰਦੇ ਨੇ ਜਿਹੜਾ ਤਨ ਨੂੰ ਹਿਰਦੇ ਨੂੰ ਰੰਗ ਚਾੜ ਦੇਵੇ ਰੰਗ ਦੇਵੇ ਰੱਤਾ ਮੇਰਾ ਠੋੜਾ ਤਾਨ ਤਾਨ ਨੂੰ ਰੰਗ ਦੇਵੇ ਹਿਰਦੇ 'ਚ ਰੰਗ ਚਾੜ ਦੇਵੇ ਜਿਹੜਾ ਬੰਦੂ ਰੰਗ 'ਚ ਆਪਣੇ ਨਾਮ 'ਚ ਰੱਗ ਲਵੇ ਹੈੁੁਕਤ ਕਰਾਵਣ ਹਾਰਾ ਇਹ ਜਿਹੜਾ ਗੁਰ ਹੈ ਨਾ ਕੁਰਬਾਨੀ ਦਾ ਸਿਰਫ ਦੋ ਪਦਾਂ ਮਿਲਦੇ ਨੇ ਨਾ ਮੁਕਤ ਮੁਕਤੀ ਹੋ ਗਣਾ ਜੇ ਕੋਈ ਤਾਂ ਗਿਆ ਮੁਕਤ ਕਰਾਉਣ ਦੇ ਦਰਗਾਹ ਚ ਨਾਮਤਾ ਠੀਕ ਹੈ ਜੀ ਇਹ ਜਿਹੜਾ ਅੰਤਰਗੁਰ ਗਿਆਨ ਗਿਆਨ ਪਦਾਰਥ ਹੈ ਨਾਮ ਵੀ ਜਣੂ ਆਇ ਇਹ ਗਿਆਨ ਪਦਾਰਥ ਹੈ ਤਤ ਗੁਰਬਾਣੀ ਹਰ ਲੋਕ ਸਮਾਏ ਇਹ ਆਪਣਾ ਜਿਹੜਾ ਅਪਰਿਸ਼ਵਤ ਵਿਚਾਰ ਦੇ ਇਹ ਹੋਇਆ ਠੀਕ ਹੈ ਰੋਸ਼ਨੀ ਹੁੰਦੀ ਆ ਨਾ ਚੱਲਣਾ ਪੈਂਦਾ ਨਾ ਹਾਂ ਜਿਤੇ ਰਤਨ ਪਾ ਗਾਇਓ ਚਲ ਨਾਪੇ ਹੋ ਜਣ ਠੀਕ ਹੈ ਜੀ ਨਾਨਕ ਜਿਸ ਨੂੰ ਨਦਰ ਕਰੇ ਸੋ ਪਾਏ ਤੋ ਹੋਵੇ ਦਰ ਸਚਿਆਰਾ ਆਹ ਕਹੇ ਕਿ ਨਦਰ ਕਰੇਗੀ ਤੇ ਕਿਰਪਾ ਕਰ ਦਵੇ ਪ੍ਰਭੂ ਸੋ ਪਾਏ ਇਹ ਨਾਮ ਰਤਨ ਵੀ ਜਿਹੜਾ ਹੈ ਨਾ ਉਹਦੀ ਸਮਝ ਆਉਂਦਾ ਜਿੱਤੇ ਕਿਰਪਾ ਕਰੇ ਕਿਰਪਾ ਕਰੇ ਅਗੋਚਰ ਬੁੱਧੀ ਤੋਂ ਭਰੇ ਉਹ ਜਿੰਨਾ ਕਿ ਬੁੱਧੀ ਤੋਂ ਪੱਕਿਆ ਨਾ ਉਹਦੀ ਕੋ ਲਾਈਟ ਹੋ ਦੇ ਰੁੱਦਾ ਕਿਰਪਾ ਕਰ ਦਿੱਤ ਉਹ ਸਮਝ ਆ ਜਾਂਦਾ ਵਸ ਜਿਹੜੀ ਪੌੜੀ ਡੇਰੀ ਚੜ੍ਹੂਗੀ ਬੱਚੇ ਤੇ ਹੰਦੂਆ ਨਾਲ ਤਾਂ ਸਭ ਚਾਹੁੰਦਾ ਇਹ ਗਿਆਨ ਵੀ ਸਾਰਿਆਂ ਨੇ ਨਹੀਂ ਸਮਝ ਚਾਹੁੰਦਾ ਬਦੇ ਸਾਰੇ ਸੁਣਦੇ ਦੇ ਗੁਰੂ ਘਰ ਤੇ ਸਾਰਿਆਂ ਨੇ ਸਮਝ ਲਈ ਸੀ ਹੁੰਦਾ ਬੁੱਧੀ ਦੇ ਲੈਵਲ ਇੱਕ ਖਾਸ ਲੈਵਲ ਤੇ ਜਾ ਕੇ ਸਭ ਕਿਉਂਕਿ ਫਿਰ ਗਿਆਨੀ ਕੀ ਘੱਟ ਤੂੰ ਗਿਆਨੀ ਜਲ ਉਹ ਡੇੜੇ ਹੀ ਹੁੰਦਾ ਥੋੜੇ ਫਰਕ ਨਾਲੇ ਜਦ ਹੁੰਦੀ ਕੋਈ ਟੈਰੀ ਜਿਹੜੀ ਜੱਟ ਬਤਵਾ ਹੁੰਦਾ ਫਰਕ ਥੋੜਾ ਹੁੰਦਾ ਉਹਦੇ ਹੀ ਸਭ ਠੀਕ ਹੈ ਜੀ ਪੌੜੀ ਧੰਨ ਧੰਨ ਸੋ ਜੋ ਸਤਗੁਰ ਚਰਣੀ ਜਾਏ ਪਿਆ ਧੰਨ ਧੰਨ ਸੋ ਗੁਰ ਸਿੱਖ ਕਹੀਏ ਜਿਨ ਹਰ ਮੁਖ ਰਾਮ ਕਹੇ ਸੰਤਾਂ ਦਾ ਉਹ ਗੁਰ ਸਿੱਖਾ ਪਹਿਲੂ ਕਿਹਾ ਜਾਣ ਜਾਈਨਾ ਜੇ ਸਤਗੁਰ ਚੜ੍ਹਦੀ ਯਾਰ ਪਿਆ ਜਿਹੜਾ ਸਤਗੁਰ ਤੇ ਚੜ੍ਹਦੀ ਨਾਲ ਗਿਆ ਨਾ ਸਤਗੁਰ ਦੀ ਗੱਲ ਨੂੰ ਸਾਥ-ਸਾਥ ਲਿਆ ਬਸ ਉਹ ਧੰਨ ਹੋ ਗਿਆ ਧੰਨ ਤੋਂ ਰੋਕ ਕੇ ਨਹੀਂ ਗੱਲ ਹਾਂਜੀ ਇਹਨਾਂ ਹਾਲ ਨਾਬ ਰਾਮ ਕਹਿਆ ਹਾਂ ਜਿਹੜਾ ਪੂਰਾ ਸਮਝ ਗਿਆ ਜਿਹਨੂੰ ਪੂਰੀ ਸਮਝ ਆ ਗਈ ਇੱਕ ਤਾਂ ਹੋਇਆ ਨਾ ਦਾਖਲ ਸਕੂਲ ਚ ਇੱਕ ਪਾਸ ਹੋ ਕੇ ਬਾਹਰ ਕਰਕੇ ਉਹਦੇ ਇਮਤਾਨ ਦੇ ਕੇ ਕਹਿ ਕੇ ਜਿਸ ਮੁੱਖ ਮੂੰਹ ਚੋਂ ਰਾਮ ਨਿਕਲ ਗਿਆ ਉਹਨੇ ਟੈਸਟ ਬਿਆਨ ਕਰਤਾ ਕਹਿਆ ਧਨ ਧਨ ਸੋ ਗੁਰਸਿੱਖ ਕਹੀਏ ਜਿਸ ਹਰ ਨਾਮ ਸੁਣਿਆ मन आनंद भया तन तानस तन सो गुरु सिख जिन सतगुरु सेवा कर हर नाम ले ओ गुर हर नाम सुन कीना ने सुन लिया ना इतन लगते कोना दे हो गया आपी ਉਹ ਤੁਹਾਡਾ ਭਾਗ ਸੀ ਉਹਨਾਂ ਦੇ ਇੱਥੇ ਬਣਾਏ ਦੀ ਬੰਦੇ ਉਹਨਾਂ ਨੂੰ ਬਿਲਕੁਲ ਇੱਕ ਵਾਰ ਚ ਹਿੱਟ ਹੋ ਗਿਆ ਉਹ ਧਰੇ ਤਾਂ ਨੇ ਇੱਕ ਵਾਰ ਗੁਰਦੀ ਆਪਾਂ ਨੂੰ ਜਾਣਦੇ ਵੀ ਨਹੀਂ ਲੋਕ ਮੈਂ ਅਟੈਚ ਹੋ ਗਿਆ ਜੇ ਮੈਂ ਕਿਤੇ ਪਹਿਲਾਂ ਹੀ ਕੋ ਖੋਦੀ ਅੰਦਰ ਧਰਤੀ ਨੂੰ ਪਿਆਸ ਹੁੰਦੀ ਹੈ ਬਹੁਤ ਜ਼ਿਆਦਾ ਕਿ ਬਿਆਨ ਨੂੰ ਤਕੀਫ ਆ ਜਾਂਦਾ ਕਿ ਲੋ ਫੈਸਲਾ ਉਹੀ ਥਲੇ ਜਾਈਏ ਸੁਣਦੇ ਸਾਰੇ ਅਸਰ ਹੋ ਗਿਆ ਐਸੇ ਵੀ ਨੇ ਔਰ ਇਹ ਸਾਲ ਸੁਣ ਕੇ ਬਾਅਦ ਚ ਹੁਣ ਘਰ ਬੈ ਗਏ ਨੋਬਰੀ ਨਾ ਜਵਾਂ ਝੱਲੋ ਪਰ ਅੱਛਾ ਇਹਦਾ ਇਹ ਭਾਵ ਤਾਂ ਨਹੀਂ ਕਿ ਹਰ ਸੁਣਿਆ ਇਹਦਾ ਗਿਆਨ ਸੁਣੀ ਹੋਈ ਹੈ ਕਿਸੇ ਤੇ ਆਪਾਂ ਕਿਹਾ ਸੀ ਨਾ ਪਹਿਲੇ ਵਾਰ ਉਹਨੇ ਦਾਖਲਾ ਲਿਆ ਦੂਏ ਵਾਲੇ ਨੇ ਪਾਸ ਕਰ ਲਿਆ ਤੀਸਰਾ ਕੌਣ ਹੈ ਫਿਰ ਸੁਣ ਕੇ ਗੁਰੂ ਵਾਲਾ ਹੋ ਗਿਆ ਇੱਕ ਨੇ ਵਿਸ਼ਵਾਸ ਨਹੀਂ ਕੀਤੀ ਉੱਥੇ ਆ ਬੈਠਦੇ ਨੇ ਦੂਏ ਵੀ ਜਿਹੜੇ ਬਰਛਲ ਦੇ ਕੂੜੇ ਆਰ ਸਾਰੇ ਦੇ ਸੁਣਦੇ ਸਾਰੇ ਅਸਰ ਹੋ ਗਿਆ ਨਾ ਉਹ ਤੁਹਾਨੂੰ ਤਾਂ ਰਹੀ ਸੀ ਧੰ ਧੰ ਸੋ ਗੁਰਸਿੱਖ ਕਈਏ ਜਿਨ ਸਤਗੁਰ ਸੇਵਾ ਕਰੀ ਹਰ ਨਾਮ ਲਿਆ ਆ ਦੇਖ ਆ ਜਿਹੜੇ ਸਤਗੁਰ ਦੀ ਸੇਵਾ ਕਰੀ ਆ ਗੋਲ ਲੈ ਲਿਆ ਪੂਰਾ ਪਾਸ ਹੋ ਗਿਆ ਗੋਲ ਲੈ ਕਿਉਂਕਿ ਲੈਦਾ ਨਹੀਂ ਨਾ ਕੋਈ ਉਹ ਤਸਕਰ ਜੋ ਨਾਮ ਨਾਲ ਲੈ ਵੇ ਦੇ ਰਹੇ ਨੇ ਜਾ ਕੇ ਲੋਕ ਲੈਦੇ ਦੀ ਉਹ पे ਉਹ ਤਨ ਤੁਨ ਦੀ ਕੋਈ ਹੋਰ ਕਿਸੇ ਤੋਂ ਠੀਕ ਹੈ ਜੀ ਇਸ ਗੁਰਸਿੱਖ ਕੋ ਹ ਸਦਾ ਉਹ ਗੁਰ ਦੇ ਘਰੂ ਗਏ ਸਦਾ ਨਤਮਕ ਤਕਾ ਕਰ ਦੁਸ਼ਕਾਰ ਕਰ ਰਹੇ ਆਂ ਗੇੜਾ ਗੁਰਕੇ ਪਾਲੇ ਚੱਲ ਪਿਆ ਆਪਣਾ ਪਾਲਾ ਛੱਡ ਦਿੱਤਾ ਗੁਰਕੇ ਪਾਲੇ ਛੱਡ ਗਏ ਕਿਹੜੇ ਗੁਰਕੇ ਸੇ ਸੁਖ ਹੋ ਗਏ ਉਹਦੇ ਵਾਕੇ ਰਹਿ ਗਏ ਤੱਕ ਦੁਸਤ ਸਭ ਸੋਪਤਾ ਗੁਰ ਕੋ ਹੋ ਕਾ ਬੁੱਢਿਆ ਪਾਈਏ ਪੋਣਾ ਦੀ ਗੱਲ ਆ ਉੱਤੇ ਦੱਕੇ ਜੋ ਨਾਮ ਵਾਲੇ ਦੀ ਗੱਲ ਧਾਵੜਾ ਦਾ ਸਤਗੁਰ ਹੈ ਦਾ ਸਤਗੁਰ ਹੈ ਇਹ ਸਤਗੁਰ ਤੋਂ ਜੋ ਜਿੱਕੇ ਆਏਦੇ ਸੁਣ ਹਾਇਰ ਕਿ ਜਦ ਬੁਢੇ ਕੇ ਸਦੇ ਤੋਂ ਬੁਢਿਆ ਪਹਿਲੇ ਆ ਪਹਿਲੇ ਦੇ ਬੁਢੇ ਨੇ ਉਹ ਕਹਿੰਦੇ ਉਹ ਤੱਦ ਤੱਦ ਆ ਗੱਲ ਠੀਕ ਹੈ ਜੀ ਇੱਥੇ 18ਵੀਂ ਪੌੜੀ ਸਮਾਪਤੀ ਜੀ